ਜੇ ਲੋਕ ਮਹੱਲਾ ਪੰਜਵਾਂ ਰਾਤਨਾ ਵਿਹਾਵੀ ਸਾਖਤਾਂ ਜਿੰਨਾ ਵਿਸਰੇ ਨਾਉ ਰਾਤ ਦਿਨਸ ਸੁਹੇਲੀਆਂ ਨਾਨਕ ਹਰ ਗੁਣ ਗਾਉ ਰਾਤਨਾ ਵਿਹਾਵੀ ਸਾਖਤਾਂ ਜਿਹੜੇ ਸਾਖਤ ਨੇ ਕਿ ਨੇ ਹੈ ਜਿਹੜੇ ਕੀਰਤਨ ਸਰਵਾਰਾਂ ਨਹੀਂ ਕਹਿੰਦੇ ਸਾਖਤਾਂ ਨੂੰ ਯਾਦ ਨਹੀਂ ਦਿੰਦੀ ਆਪਣਾ ਦੀ ਰਾਤ ਬੜੀ ਰਹੂਗੀ ਜੇ ਪਰਦੇਸੋਂ ਬਣਿਆ ਹੋਊ ਗਿਆਨਤਾ ਨਹੀਂ ਦੂਰ ਹੋ ਸਕਦੀ ਉਹਨਾਂ ਦੀ ਅਗਿਆ ਜਾਂ ਰਾਤ ਬੀਤ ਜੂ ਕਿਸੇ ਤੇ ਦੱਜਾ ਨਾ ਸਿਰ ਚੜ੍ਹਾਈ ਨਹੀਂ ਉਹਨਾਂ ਦੇ ਆ ਦੋ ਜਦ ਦਿਸਰ ਜਾਂਦਾ ਹੈ ਨਾ ਕਰਾ ਲੋ ਕਰਾ ਲੋ ਕਰਾ ਲੋ ਕਰਾ ਲੋ ਤੋ ਨੂੰ ਬਫੂ ਸੇ ਤੋ ਰਖਣ ਉਹਨਾਂ ਦਾ ਅਸਲ ਕਰ ਆਪਣਾ ਆਪਣੇ ਤੇ ਗਲਾ ਦੇ ਦੂ ਦੂ ਰੋ ਬਫੂ ਸੇ ਬਰਖਣਾ ਆਵ ਆਗਿਆ ਵੀ ਹੈ ਤੇ ਵੀ ਹੈ ਰਾਜ ਕੇ ਦੇਰ ਕੇ ਸੁਹੇਲੀਆਂ ਨੇ ਜਾਣਕਾਰ ਗੁਣ ਗਾਓ ਤੇਰੀ ਰਾਜ ਦੇ ਸੁਹੇਲੀਆਂ ਨੇ ਗੁਰਮੁਖੀ ਰੂਹਾਂ ਦੇ ਉਹ ਹਰ ਗੁਣ ਗਾਉਂਦੀਆਂ ਰਹਿੰਦੀਆਂ ਉਹਨਾਂ ਦਾ ਗੁਣ ਉਹ ਦੂਜਿਆਂ ਨਾਲ ਕੀ ਆ ਦੂਜਾ ਜਗਰਾਤੇ ਤੇ ਜਗਰਾਤਾ ਹੀ ਆ ਜਿਹੜੇ ਰਣ ਸਵਾਈਆ ਅਸਲ ਛੇਤੂਆਂ ਦੇ ਜਿਹੜਾ ਜਗਰਾਤਾ ਹੈ ਉਹਦਾ ਨਾਮ ਰਣ ਸਵਾਈ ਰੱਖ ਲਿਆ ਕੱਲ ਉਹੀ ਆ ਪਰ ਕੋਈ ਨਹੀਂ ਆ ਨਾਮ ਬਦਲਿਆ ਉਹ ਜਗਰਾਤਾ ਦਾ ਤੇ ਰਣ ਸਵਾਈ ਕੱਲ ਨਾਲ ਹਾਂਜੀ ਕਿਹ ਜੀ ਰਾਤ ਦਿਨ ਸੁਹੇਲੀਆਂ ਨਾਨਕ ਹਰਗੁਣ گاਉਂ ਲਿਖਿਆ ਹੋਇਆ ਇੱਥੇ ਬਿੰਦੀ ਲਾਈ ਹੋਈ ਹੈ گاਉਂ ਹੁੰਦਾ ਅਖਰਕ ਸ਼ਬਦ ਕਿਹ ਜੀ گاਉਂ ਹੁੰਦਾ گاਉਂ ਗਾਉਂ ਹੈ گاਉਂ ਕਹਤੇ گاਉਂ ਤਾਂ ਪਿੰਡ ਵੱਡ ਜਾਊਗਾ ਫਿਰ ਠੀਕ ਹੈ ਇੱਥੇ ਬਹੁਤ ਆਰਬੂਦ ਨਾਲ ਪਿੰਡ ਕਹਿੰਦੇ ਨੇ گاਉਂ ਨੂੰ ਪਤਾ ਨਹੀਂ ਕੀ ਕੀ ਕਰਦੇ ਰਹੇ ਨੇ ਲੱਡੀਆਂ-ਬੰਡੀਆਂ ਲਾ ਕੇ ਕੋਈ ਗੱਤ ਬਣ ਚਲਾਈ ਗਏ ਨੇ ਮੈਂ ਤਾਂ ਉਹਨਾਂ ਨੂੰ ਹੈ ਨਹੀਂ ਕਿਸੇ ਦੀ ਤਾਂ ਉਹਨਾਂ ਸੋਝੀ ਸੀ ਕੋਲ ਬਣਦੀ ਬਈ ਰੜੀ ਹੋਰ ਰੋਲਾ ਬੋਲਦੇ ਨੇ ਬਿੰਦੀਆਂ ਲਾਓ ਪਹਿਲਾਂ ਦਾ ਬਿੰਦੀ ਪਹਿਲਾਂ ਲੱਗੀ ਈ ਨਹੀਂ ਕਿਸਨ ਤੇ ਪੇਰ ਬੰਦੀ ਇਹਦਾ 30 40 ਸਾਲ ਤੇ ਰੋਲਾ ਪਾਇਆ ਨਾ ਜੀ ਅੱਛਾ ਜੀ ਮਹੱਲਾ ਪੰਜਵਾਂ ਰਤਨ ਜਵੇਹਿਰ ਮਾਨਕਾ ਅੱਬੇ ਮਣੀ ਮਥਨ ਨਾਨਕ ਜੋ ਪ੍ਰਭ ਭਾਣਿਆ ਸੱਚੇ ਦਰਸੁ ਹਨ ਰਤਨ ਜਵੇਹਿਰ ਬੋਲਦਾ ਜਿਹੜੇ ਗੁਰ ਨੇ ਰਤਨ ਵੀ ਜੋ ਇਹਨੇ ਗੁਰ ਨੇ ਅੱਬੇ ਮਲੀ ਬਥਰ ਸਾਰੀਆਂ ਬਣਿਓ ਸਾਦੇ ਵਿੱਚ ਨੇ ਬੁੱਧਰ ਵਿੱਚ ਦੇ ਬੁੱਧਰ ਹੋਈਏ ਬੁੱਧਰ ਕਰੀਏ ਗੁਰਬਾਣੀ ਨੂੰ ਵਿਚਾਰੀਏ ਸਭ ਕੁਝ ਪ੍ਰਾਪਤ ਹੈ ਪਰ ਸਦੀ ਕਰਦੇ ਨੇ ਬੁੱਧਰ ਆਹ ਕਹਿੰਦੇ ਉਹਨਾਂ ਨੇ ਸਮੁੰਦਰ ਮੰਤਨ ਕੀਤਾ ਤਾਂ 14 ਰਤਨ ਨਿਕਲੇ ਗੁਰਬਾਣੀ ਸਮੁੰਦਰ ਹੈ ਤੇ ਬੁੱਧਰ ਹੀ ਨੇ ਸਾਦੇ ਪ੍ਰਾਪਤ ਹੋਣੇ ਰਤ ਜਵੇਹਿਰਮਾਨ ਤੋਂ ਹੋੜਲੇ ਜੋ ਪ੍ਰਪਾਣਿਆ ਆ ਨਕਾ ਦਾ ਜੋ ਪਰਮਦੇਵਾਲੇ ਵਿਚਾਰ ਆ ਗਿਆ ਸੱਚੇ ਦਰਸੋਂ ਹਨ ਉਹ ਸਮਝਦਾ ਸੱਚੇ ਦਰਸੇ ਸੋ ਮੈਂ ਖੜਾ ਹੈ ਪਾਣੇ ਤੋਂ ਦੀ ਸਾਰੇ ਦਰਸੇ ਚਲਾ ਗਿਆ ਮਾਇਆ ਦੇ ਵਿੱਚ ਮਾਇਆ ਦੇ ਵਿੱਚ ਹੁੰਦਾ ਹੋਇਆ ਵੀ ਮਾਇਆ ਵਿੱਚ ਵੀ ਹੋ ਸੱਚਾ ਸਤਗੁਰ ਸੇਵ ਸੱਚ ਸਮਾਲਿਆ ਜੇ ਸਤਗੁਰ ਅੱਗੇ ਘੱਲਿਆ ਸੱਚੇ ਸਤਗੁਰੂ ਦੀ ਸੇਵਾ ਕਰ ਜਿਹਨੇ ਕੀ ਕੀਤਾ ਸੱਚਾ ਸਤਗੁਰੂ ਸੇਕ ਸੱਚੇ ਸਤਗੁਰੂ ਨੂੰ ਸੇਵ ਕੇ ਸੱਚ ਸਭੋਲੇ ਜਿਹਨੇ ਸੇਵ ਲਿਆ ਉਹ ਸੱਚ ਜੇ ਸਮਾ ਗਿਆ ਉਹ ਆਪਣੇ ਸਤਗੁਰ ਤੇ ਸਮਾ ਗਿਆ ਇੱਕ ਹੋ ਗਿਆ ਉਹਦੇ ਨਾਲ ਆਏ ਜੇ ਸਤਗੁਰ ਅੱਗੇ ਥਾਲਿਆ ਜਿਹਨੇ ਸਤਗੁਰ ਦੇ ਅੱਗੇ ਹੋ ਕੇ ਕਾਲਨਾ ਕੀਤੀ ਉਹ ਹੁਣ ਬਾਣੀ ਰਹਿ ਕੇ ਉਹਦੇ ਹੁਕਮ ਤੇ ਰਹਿ ਕੇ ਕਾਲਨਾ ਕਾਈ ਕੀਤੀ ਹੈ ਉਹ ਸਤਗੁਰ ਤੇ ਅਖਤ ਵੇਲੇ ਉਹਦਾ ਸਹਾਇਕ ਬਣ ਗਿਆ ਅੱਗੇ ਆਫੇਸ ਹੋ ਗਿਆ ਉਹਦਾ ਟਾਈਮ ਆਇਆ ਅੰਧਰਾ ਤਾ ਹੋ ਗਿਆ ਆਕਲੋ ਕੇ ਆਪਣੇ ਨਾਲ ਲੈ ਹਾਂਜੀ ਸਤਿਗੁਰ ਅਤੇ ਚਿੱਤਰ ਵਿੱਚ ਕੀ ਆਇਆ ਜੀ ਆ ਜੀ ਹਾਂ ਚਾਰ ਕਰਤਾ ਵਸਤਾ ਵਿੱਚ ਹੈ ਹੋ ਸਤਿਗੁਰ ਆਦੋ ਨੇ ਪੂਰੇ ਪਰਮੇਸ਼ਰ ਵੀ ਸ਼ਬਦ ਗੁਰੂ ਵੀ ਪ੍ਰਗਟੇ ਆ ਸ਼ਬਦ ਦੇ ਨਾਲ ਹੀ ਚੱਲੇ ਜਾਂਦਾ ਨੇ ਬਾਣੇ ਦੇ ਵਿੱਚ ਦੇ ਜਿਹੜੇ ਸ਼ਬਦ ਹੁਕਮ ਦੇ ਨਾਲ ਨੇ ਆਹ ਕੋ ਰੂਪੇ ਹੋ ਗਿਆ ਤਖਲੋਆ ਆਏ ਜੇ ਸਤਗੁਰ ਅੱਗੇ ਘਰ ਲਿਆ ਇਹ ਗਿਆਨ ਹੀ ਖਲੋਇਆ ਤੇ ਹਾਂ ਜੀ ਛੇਰੀ ਗਿਰਦਾ ਹੱਸਦਾ ਹੋਣਾ ਹੀ ਹੈ ਜਿਹੜੀ ਇਹ ਕੜੀ ਚੱਲਦੀ ਸੀ ਜੰਮਣ ਰਾਮ ਗਰਭ ਦੇ ਵਿੱਚ ਜਿੱਦਿ ਜੂਨਾ ਲੈਂਦਾ ਸੀ ਲਗਾਤਾਰ ਕਦੇ ਥੱਲੇ ਨੂੰ ਕਦੇ ਉੱਪਰ ਦਾੰਤ ਹੋਇਆ ਉਹ ਆ ਪਰ ਹੈ ਤਾਂ ਗਿਆਨ ਸਰੂਪ ਦੀ ਉਹ ਗੱਲ ਹੋ ਰਹੀ ਹੈ ਨਾ ਜੀ ਕੋਈ ਬੰਦਾ ਤਾਂ ਨਹੀਂ ਸਤਗੁਰ ਖੜ ਗਿਆ ਅੱਗੇ ਉੱਥੇ ਹੋਰ ਕੀ ਆਉਣਾ ਸੀ ਜਿਹਦੀ ਲੋੜ ਸੀ ਉਹੀ ਆਇਆ ਕੀ ਕਿ ਗਿਆਨ ਮੰਡਲ ਦੀਆਂ ਗੱਲਾਂ ਸਾਬ ਹਾਂਜੀ ਬਿਲਕੁਲ ਬਿਲਕੁਲ ਕੋਹ ਨਾ ਸਕੇ ਝਮਕਾਲ ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਏ ਦੀਵਾ ਕੀ ਹੈ ਝਮਕਾਲ ਭਰਮ ਭਰਮ ਵਿਚਾਲੇ ਹੁੰਦਾ ਹੈ ਸਪਰਤਖ ਦੀ ਹੁੰਦਾ ਭਰਮ ਤਾਂ ਨੇੜੇ ਵੀ ਨਹੀਂ ਆਉਂਦਾ ਜੇ ਭਰਮ ਹੈ ਹੈ ਸੱਚ ਸੱਚ ਸਭਾ ਗਿਆ ਕਾ ਕੋਈ ਨਾ ਸਕੇ ਉਹਦੇ ਛੂਹ ਵੀ ਨਹੀਂ ਸਕਦਾ ਪਰ ਉਹ ਤਾਂ ਨੇੜੇ ਵੀ ਨਹੀਂ ਆਉਂਦਾ ਪਰ ਉਹਦਾ ਨਾਮ ਹੀ ਹੋ ਚੁੱਕਿਆ ਨੇੜੇ ਕੀ ਹੁੰਦੇ ਉਹਨੂੰ ਮਾਇਆ ਜਿਹੀ ਰੱਖਿਆ ਜਾ ਸਕਦਾ ਉਹਦਾ ਪਰਮਨਾਡ ਦਾ ਹੀ ਫਟ ਗਿਆ ਉਹ ਨਾਲ ਸਕਦਾ ਜਮ ਕਾਲ ਸੱਚਾ ਰਖਵਾਲਾ ਸੱਚਾ ਰਖਵਾਲੀ ਦਾ ਰਖਵਾਲਾ ਹੀ ਸ਼ਬਦ ਗੁਰੂ ਦਾ ਰਖਵਾਲਾ ਹੋ ਜਵੇ ਉਹਨੂੰ ਜਮ ਕਾਲ ਹਾਂਜੀ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਗੁਰਸਾਖੀ ਹੈ ਜਿਹੜੀ ਗੁਰੂ ਜੀ ਸਿਖਿਆ ਇਦੇ ਨਾਲ ਉਹਦੀ ਜਿਹੜੀ ਬੁੱਧੀ ਅਪਰਜੰਤ ਹੋ ਗਈ ਗਿਆਨ ਖਾਣ ਦਾ ਗਿਆਨ ਘਟ ਬੜਿਆ ਜੋਤ ਦੇ ਰਾਹੇ ਦੀਵਾ ਬੜਿਆ ਦੀਵਾ ਬੜਿਆ ਤੇ ਨਾਲੇ ਜਾਰੇ ਜੇ ਦੀਵਾ ਬੜਿਆ ਦਾ ਚੱਕਿਆ ਗਿਆ ਗਿਆਨ ਦੂਰ ਹੋ ਮਨਮੁਖ ਵਿਣ ਨਾਮੇ ਕੂੜਿਆਰ ਫਿਰੇ ਬੇਤਾਲਿਆ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਮਨਮੁਖ ਬਣਨ ਦਾ ਕੂੜਿਆਰ ਫਿਰੇ ਬੇਤਾਲਿਆ ਬੜਾ ਮੁਕੜਾ ਨੋਕ ਤੇ ਬਣਾਨੇ ਕੂੜਿਆ ਵਾਲ ਨੇ ਝੂਠੇ ਝੂਠ ਨਾਲਾਂ ਦਾ ਰਿੱਧੀਆਂ ਸਿੱਧੀਆਂ ਪਾਇਆ ਇਹ ਸਭ ਕੂੜਿਆ ਵਾਲ ਨੇ ਵਾਇਆ ਨਾਲ ਪ੍ਰੇਮ ਹੈ ਵਾਇਆ ਨਾਲ ਹੋਇਆ ਕੂੜਿਆ ਵਾਲ ਨੇ ਝੂਠ ਬੋਲਦੇ ਫੇਰੇ ਬਿਟਾਲਿਆ ਬਿਟਾਲਿਆ ਨੇ ਸਹੀ ਗੱਲ ਹੁਣ ਕਿਤੇ ਨੂੰ ਚਲੇ ਜਾਣ ਬਿਆਨ ਸੱਚ ਦਾ ਹੋਈ ਨਹੀਂ ਚਲਦਾ ਸੱਚ ਕੀ ਹੈ ਕਿ ਉਹ ਨਾਲ ਬਰਤੋਂ ਬਾਹਰ ਬਿਟਾਲੇ ਨੇ ਇਦੋਂ ਜਾਂਦੇ ਇਦੋਂ ਗੋਲਦੇ ਇਦੋਂ ਜਾਂਦੇ ਉਹਨਾਂ ਦੇ ਆਪਣੇ ਬਿਆਨ 'ਚ ਕੱਟੋ ਵਰਤੀਆਂ ਕੱਟਾਂ ਟਿਕੂ ਲੈਂਦੇ ਆਗੇ ਮਾਇਆ ਦੀ ਮੂਰਤੀ ਚਮਤ ਕਿਸੇ ਆਦਮੀ ਦੇ ਉਹਨਾਂ ਦੀ ਦੇਖ ਰਹੀਦੀ ਆ ਵਾਹ ਪੁਰਜ ਬਣਾਏ ਹੋਏ ਨੇ ਪਤਾ ਨਹੀਂ ਕੀ ਕੀ ਆਪਣੇ ਆਪਣੇ ਉਹਨਾਂ ਨੇ ਕੀਤੇ ਹੋਏ ਨੇ ਪਸ਼ੂ ਮਾਨਸ ਚਾਹੇ ਉਹ ਆਦਮੀ ਕਹਿੰਦੇ ਨੇ ਪਰ ਪਸ਼ੂ ਇਹਦੇ ਸਰੀਰ ਕਰਕੇ ਤਾਂ ਸਾਰੇ ਹੀ ਮਾਨਸ ਚਾਰ ਦੂਤ ਲੇਟੇ ਉਧਰੋਂ ਚਾਵਲ ਦੇ ਵਿਚ ਆਟਾ ਜਮ ਜਲ ਬਿਟੇ ਰਹੂਦ ਇਹ ਗੋਣਸ ਪਸ਼ੂਦ ਬਾਣ ਦੀ ਜੂਰ ਚ ਪਸ਼ੂਏ ਰਹੇ ਅੰਦਰ ਕਾ ਪੰਦਰ ਕਾਲੇ ਲਿਆ ਗਿਆ ਟੈਨ ਦੇ ਅੰਦਰ ਪਰਮਾਣੂ ਹੋਇਆ ਇਹਨਾਂ ਦੇ ਹਾਂਜੀ ਸਬੋ ਵਰਤੇ ਸੱਚ ਸੱਚਾ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲੇ ਸਬੋ ਵਰਤੇ ਸੱਚ ਸੱਚੇ ਸ਼ਬਦ ਨੇ ਹਲ ਜਿਹੜੇ ਸੱਚੇ ਸ਼ਬਦ ਨਾਲ ਗੁਰਬਾਣੀ ਨਾਲ ਨਿਹਾਲ ਹੋ ਜਾਣ ਜਿਨ੍ਹਾਂ ਨੂੰ ਕੁਝ ਪੱਲੇ ਪੈ ਗਏ ਗੁਰਬਾਣੀ ਦੇ ਸ਼ਬਦ ਸਾਰੀ ਪੱਲੇ ਸਮਝ ਆ ਜਵੇ ਉਹਨਾਂ ਦਾ ਤਾਂ ਸਭ ਸੱਚੇ ਸੱਚ ਵਰਤਨ ਨਾਲ ਹਾਲਿਆ ਕਿਰਪਾ ਹੋ ਜਵੇ ਕਿਰਪਾ ਨਾਲ ਹਾਲ ਹੋ ਜਾਣ ਨਾਨਕ ਨਾਮ ਦੀ ਪੂਰੇ ਗੁਰ ਦੇ ਖਾਲਿਆ ਤਾਂ ਕਹਿੰਦਾ RAM ਨਰਾਣ ਨਾਮ ਨਾਮ ਤੋਂ ਕੀਮਤੀ ਕੋ ਖਜ਼ਾਨਾ ਹੋਰ ਹੈ ਨਹੀਂ ਪੂਰੇ ਗੁਰ ਦੇ ਖਾਲਿਆ ਪੂਰੇ ਸਤਗੁਰ ਨੇ ਆ ਪੂਰੇ ਗਿਆਨ ਨਾਲ ਪੂਰੇ ਗਿਆਨ ਦੀ ਪ੍ਰਾਪਤੀ ਨਾਲ ਸਤਗੁਰ ਤੋਂ ਪੂਰੇ ਸਤਗੁਰ ਤੋਂ ਪੂਰੇ ਗਿਆਨ ਦੀ ਪ੍ਰਾਪਤੀ ਨਾਲ ਐਨ ਪ੍ਰਤੱਖ ਹੋ ਗਿਆ ਦਿਲ ਨਜਰ ਆ ਗਿਆ ਸਮਝ ਲਾਜੀ ਤੇ ਖਾਲਿਆਂ ਦਾ ਬੰਦਾ ਸਮਝ ਲਿਆ ਠੀਕ ਹੈ ਜੀ ਇੱਥੇ 14ਵੀਂ ਸਮਾਪਤੀ ਹੈ ਜੀ